ਹਾਂਜੀ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾ ਹੈ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਦਲਾਲੀ ਹਾਂਜੀ ਜਿਹੜਾ ਜਿਹਦੇ ਮੰਨਣਾ ਕੀਤੀ ਹੈ ਜਿਹਦੇ ਦੇ ਗੁਰਮਤ ਨੂੰ ਗੁਰੂ ਦਾ ਹਾਂਜੀ ਕੋਈ ਹੋਵੇ ਹੁਣ ਦੀ ਅੱਛਾ ਜੀ ਹਾਂਜੀ ਇਹ ਵੀ ਬਣਾ ਕੀਤੀ ਹੈ ਠੀਕ ਹੈ ਜੀ ਸਾਲ ਜਿਵਾਏ ਸਾਲੀ ਸਾਲ ਉਹਦਾ ਪੱਕਾ ਅੱਛਾ ਜੀ ਤਾਂ ਸਾਲਾ ਰਸੋਈ ਹੁੰਦੀ ਹੈ ਪੱਕੀ ਰਸੋਈ ਪੱਕਾ ਭੋਜਨ ਅੱਛਾ ਜੀ ਪੱਕਾ ਰੱਤਿਆ ਕੱਚੀ ਵਾਲੀ ਔਰ ਪੱਕੀ ਵਾਲੀ ਕੱਚੀ ਵਾਲੀ ਸੱਤੀ ਵਾਲੀ ਨੂੰ ਪੱਕੀ ਵਾਲੀ ਕਹਿੰਦੇ ਨੇ ਕਵੀਰ ਕਹਿੰਦਾ ਪੱਕੇ ਸੇ ਦੀ ਖੇਲ। ਅੱਛਾ ਜੀ। ਕੱਚੇ ਦਾ ਖੇਲ, ਕੱਟਿਆ ਬੰਦ ਕੱਟਿਆ। ਜਿਹੜਾ ਸ਼ਰੀਰ ਵਾਇਰ ਨਾਲ ਜੁੜਿਆ ਹੋਇਆ ਕੱਚਾ। ਅੱਛਾ ਜੀ। ਕਿੱਥੇ ਗੱਲ ਭਾਇਆ ਸਭ ਕੱਚੇ ਦੀ ਗੱਲ ਆ। ਸ਼ਰੀਰ ਕੱਚਾ ਅੰਦਰਲਾ ਸ਼ਰੀਰ ਪੱਕਾ ਜਿਹੜਾ ਆਤਮਾ ਦੀ ਗੱਲ ਹੈ ਪੱਕੀ ਹੈ। ਆਤਮਾ ਦਾ ਭੋਜਨ ਪੱਕਾ ਭੋਜਨ। ਅੱਛਾ ਜੀ। ਹਾਲੇ ਹੀ ਜੀ ਰੋਜ ਕੱਚਾ ਬੋਝਦਾ। ਠੀਕ ਹੈ। ਹਾਂ। ਜਿਹਨੇ ਕੀਤੇ ਸੋ ਬਣ ਰੋ ਜਿਹਨੇ ਗੁਰਬਤ ਬੰਦੀ ਹੈ। ਹਾਂ ਜੀ। ਉਹ ਪੱਕਾ ਬੋਝ ਤਿਆਰ ਕਰਦਾ ਪੱਕਾ ਬੋਝ ਨੇ ਸਿਖਾਉਂਦਾ ਸੋ ਲੋਕਾਂ ਅੱਛਾ ਜੀ। ਫਾਲੀ ਪੱਕਾ। ਠੀਕ ਹੈ ਜੀ। ਉਹਦੀ ਗੱਲ ਸੱਚੀ ਹੁੰਦੀ ਆ ਪੱਕੀ ਹੁੰਦੀ ਆ ਗੱਡੀ ਗੱਲ ਦੀ ਹੁੰਦੀ ਉਹਦੀ। ਅੱਛਾ ਜੀ। ਯਾ ਲੋ ਕਾਲੂ ਦੇ ਪਿੱਛੇ ਇਹ ਥਾਲ ਬਣਿਆ ਨਾ ਹਾਂਜੀ ਇਹ ਥਾਲ ਥਾਲ ਵਿੱਚ ਤੇਰੀ ਵਸਤੂ ਉੱਪਰ ਜੋ ਤੇਰੇ ਥਾਲਾਂ ਵਿਚਾਰੋ ਸੱਤ ਸੌ ਤੋਂ ਉਹ ਜਿਹੜੀ ਹੈਗੀ ਥਾਲ ਚ ਪਾਈ ਹੋਈ ਇਹ ਥਾਲ ਹੈ ਪੱਕੀ ਗੱਲ ਆ ਹੈ ਕੱਚੀ ਬੰਦੀ ਨਹੀਂ ਹੈ ਗੱਲ ਕਹਿ ਰਹੇ ਅੱਛਾ ਜੀ ਸਾਰੇ ਬੰਦੇ ਆ ਗਏ ਆਰੇ ਬੰਦੇ ਆ ਦੇ ਕਿਉਂਕਿ ਉਦੋਂ ਤੱਕ ਬੰਦੇ ਵੀ ਆ ਗਏ ਨਾ ਪਹਿਨਾ ਭਗਤ ਦੇ ਅੱਛਾ ਜੀ ਆ ਗਏ ਭੱਟ ਵੀ ਆ ਗਏ ਸਾਰੇ ਆ ਗਏ ਇਹ ਗੱਲ ਲਾਗੂ ਹੋ ਜਾਂਦੀ ਹੈ ਸਿੱਖਾਂ ਤੇ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਜੀ ਕੋਈ ਹੋ ਹੀ ਨਹੀਂ ਸਕਦਾ ਇਹਨੂੰ ਪਹੁੰਚ ਨਹੀਂ ਸਕਦਾ ਅੱਛਾ ਤੇ ਗੱਲ ਹਿੱਟ ਕਰਦੀ ਉਹਦਾ ਖਵਾਸ ਉਹ ਲੋਕ ਤਾਂ ਟੜਦੀਆਂ ਕਰਨ ਵਾਲੇ ਨੇ ਇਹ ਵੀ ਮੰਨਣਾ ਕੀਤੀ ਤਾਂ ਕਿ ਹੈ ਵੀ ਮੰਨਣਾ ਕੀਤੀ ਹੈ ਅਸੀਂ ਕੁਰਬਾਨੀ ਬੰਦੀ ਹੈ ਹੂੰ ਹੂੰ ਬੰਦ ਕੇ ਸਾੱਚ ਕੇ ਗੁਰ ਫਰਮਾਇਆ ਉਸ ਜਗਤ ਆਇਆ ਹੋ ਠੀਕ ਹੈ ਅਸੀਂ ਗੁਰ ਫਰਮਾਇਆ ਅਬਦੁੱਲ ਤੋ ਬੋਲੋ ਘਟ ਗਿਆ ਹਲੋ ਹਾਂਜੀ ਫਿਰ ਧੜਕਣ ਹਰੀ ਸਾਡੇ ਤੇ ਖੜ ਰੇ ਪੈਰਾਂ अच्छा जी ये ठाड़े हो जी हां सो जिन सवाल जो ਸੋ है साल ही ਮੰਨਣਾ ਕੀਤੀ ਦਾ ਮਤਲਬ ਸਿਫਤ ਨਹੀਂ ਹੈ ਪਹਿਲਾਂ ਹੁੰਦਾ ਕਿ ਜਨ ਕੀਤੀ ਸੋ ਮੰਨਣਾ ਇਹਦਾ ਤਾਂ ਆਪਾਂ ਹੋਰ ਨਹੀਂ ਨਹੀਂ ਨਹੀਂ اچھا جی ਬੰਨਣਾ ਕੀਤੀ اچھا جی ਕੀਤੀ اچھا جی ਕੋ ਸਾਲ ਦਾ ਵੀ ਉਹ ਪੱਕੇ ਹਾਂਜੀ ਹਾਂਜੀ ਹਾਂਜੀ ਗੱਲ ਆ ਗੱਲ ਐ ਅੱਛਾ ਜੀ ਗੱਲ ਲੱਗ ਗਈ ਅੰਦਰ ਚੜੇ ਕੋਈ ਸ਼ਬਦ ਆ ਉਹਦੇ ਨਾਲੇ ਅਟੈਚ ਐ ਅੱਛਾ ਜੀ ਠੀਕ ਹੈ ਜੀ ਹਾਂ ਤੇ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਜਿਹੜਾ ਭੋਜਨ ਪੱਕਿਆ ਹੁੰਦਾ ਨਾ ਘੋੜੇ ਦੇ ਵਿੱਚ ਹਾਂਜੀ ਸਾਤ ਵਿੱਚ ਟਾਟੋ ਹਾਂਜੀ ਉਹ ਗਿਆ ਉਹ ਕਹਿੰਦਾ ਉਹਨੇ ਪੱਕੀ ਰਸੋਈ ਕਹਿੰਦੇ ਸੀ ਸਾਧ ਰਸੋਈ ਅੱਛਾ ਜੀ ਜਿਹੜਾ ਉਹ ਰੋਟੀ ਆਪਾਂ ਖਾਉਦੇ ਉਹਨੂੰ ਕੱਚੀ ਮੰਨਦੇ ਕਹਿੰਦੇ ਪੰਜਵਾ ਕਿਰਤ ਤਾਂ ਹੋਆ ਪਾਕ ਪਵਿੱਤ ਤਾਂ ਹੀ ਜੇ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਹਾਂ ਹਾਂ ਬਸ ਬਸ ਬਸ ਬਸ ਉਹ ਵਾਲਾ ਹੈ ਅੱਛਾ ਜੀ લાલી ਵਾਇਆੜੀ ਗੱਲ ਹਾਂਜੀ ਜਿਹਦੇ ਵਿੱਚ ਸੱਤ ਗਿਆ ਜਿਹੜੀ ਗੱਲ ਚ ਪੱਕੀ ਹੈ ਅੱਛਾ ਜੀ ਸੱਤ ਪਾਇਆ ਹੈ ਠੀਕ ਹੈ ਜੀ ਅੱਜ ਕੋ ਲੋਪੋ ਜੈ ਖਾਇਆ ਛਾਚ ਪੀयो ਠੀਕ ਹੈ ਜੀ ਤੇ ਹੋਇਆ ਇਹ ਸਾਡੀ ਬਾਣੀ ਜਿਹੜੀ ਹੈ ਗੁਰਬਾਣੀ ਉਚਾਰਨ ਕੀਤੀ ਹੈ ਕੱਲ ਪਰਖੇ ਮੱਖਣ ਪਾਛੇ ਦੁੱਧ ਅੱਛਾ ਜੀ ਉਹਨਾਂ ਦਾ ਖਲਬਲੇ ਆਏ। ਜਿਹੜੀ ਬਰਤਨਾਂ ਤੋਂ ਉੱਡਾਲੀ ਬਣੀ ਹੈ ਨਾ ਦੁਰਤੀ ਬਣੀ ਵੱਖਣੇ ਰੂਪ ਚੜੀ ਹੈ। ਅੱਛਾ ਜੀ। ਉਹਨਾਂ ਠੀਕ ਹੈ ਜੀ। ਉਹ ਹਾਂਜੀ। ਫਿਰ ਦਹੀਂ ਵਾਲੀ ਦਿੰਦਾ ਠੀਕ ਹੈ ਜੀ। ਜਿੰਨ ਕੀਤੀ ਸੋ ਮੰਨਣਾ ਕੋਸਾਲ ਉਹ ਪੱਕਾ ਭੋਜਨ ਛੱਕ ਰਹੇ ਆਂ ਤੇ ਬਾਕੀਆਂ ਨੂੰ ਵੀ ਫਿਰ ਪੱਕਾ ਹੀ ਵਰਤਾ ਰਹੇ ਕੱਤ ਸ਼ਿਕਾਰ ਹੈ ਜੇ ਦੇ ਰਹੇ ਨੇ ਅੱਛਾ ਕੋ ਸਾਲ ਜਿਵਾਏ ਸਾਲੀ ਜਿਵਾਏ ਕੋ ਸਾਲ ਦਾ ਮਤਲਬ ਕੀ ਬਣਿਆ ਜਿੰਨ ਕੀ ਤਿਸ ਨੂੰ ਮੰਨਣਾ ਫਿਰ ਇੱਥੇ ਰੁਕਾਂਗੇ ਕੋ ਸਾਲ ਜਿਵਾਏ ਸਾਲੀ ਕੋ ਕੋ ਕੋਈ ਐਸਾ ਕੋਈ ਬੰਦਾ ਮਿਲਦਾ ਹੀ ਹੁੰਦਾ ਪਰ ਅੱਛਾ ਜੀ ਪਰ ਜਿਹੜਾ ਬਦਲ ਫਿਰ ਉਹ ਸਾਲ ਜਿਵਾਏ ਸਾਲੀ ਦੂਜਿਆਂ ਨੂੰ ਪੱਕਾ ਕੋਈ ਨਹੀਂ ਉਹ ਪੱਕੀ ਗੱਲ ਅੱਛਾ ਜੀ ਸੱਚੀ ਬਾਣੀ ਠੀਕ ਹੈ ਜੀ ਹਾਂ ਬੱਚਾ ਉਹਦੇ ਦੰਦ ਉਹ ਜਿਵਾਹ ਹੈ ਸਾਲੀ ਉਹੀ ਲੰਦਰ ਚਲਦਾ ਕਹਿੰਦੇ ਅੱਛਾ ਜੀ ਦੰਦ ਉਹ ਚਲਾ ਸਕਦਾ ਉਹ ਉਸ ਲੰਦਰ ਦੀ ਗੱਲ ਕਰਦੇ ਹਾਂ ਹੈ ਸਾਲੀ ਠੀਕ ਹੈ ਤੇ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਅੱਛਾ ਜੀ ਇਹ ਗੱਲਾਂ ਲੈ ਕੇ ਦਲਾਲੀ ਕਰਦਾ ਦਲਾਲੀ ਕੀ ਕਰਦਾ ਸੱਚਖੰਡ ਤੇ ਗੱਲ ਲੈ ਲੈਂਦਾ 10 ਕਰੋੜ ਵੀ ਲਿਖਿਆ ਤਾਂ ਹੀ ਇਹ ਅੱਛਾ ਜੀ ਗੱਲਾਂ ਸੱਚਖੰਡ ਦੀਆਂ ਨੇ ਇੱਥੇ ਆ ਕੇ ਸਾਨੂੰ ਸੱਚਖੰਡ ਦੇ ਯਾਰ ਜਨਤਾ ਦੇ ਵਿੱਚੋਂ ਦਲਾਲ ਹੈ ਅੱਛਾ ਜੀ ਉਹ ਜਨਸਾਰ ਨੂੰ ਸਾਖਣ ਦਾ ਉਪਦੇਸ਼ ਦਿੱਤਾ ਬਣ ਨਹੀਂ ਦਿੱਤਾ ਵਸਤੇ ਇਹ ਹੀ ਲੋਕਾਂ ਨੇ ਤੇ ਆਈ ਹੈ। ਅੱਛਾ ਦੇ ਨਾਲ ਤਾਲਮੇਂ ਦਲਾਲੀ ਵੀ ਬਣਦੀ ਐ ਉਹਨੂੰ ਵੀ ਖਾਣ ਨੂੰ ਕਰਦਾ ਵਿੱਚੋਂ। ਠੀਕ ਹੈ ਜੀ। ਇਹ ਧਰਮ ਰਾਏ ਨੂੰ ਇੱਥੇ ਸਤਿਗੁਰ ਕਹਾਂਗੇ। ਹਾਂ ਹਾਂ ਜਿਹੜੀ ਹੈ ਉਹ ਦਲਾਲੀ ਐ ਬੁਰਕੀਬਾੜੀ ਜਿਲ੍ਹਾ ਕੁਰਬਾੜੀ ਗੁਰ ਬਾਣੀ ਨੂੰ ਕਿ ਜਿਹੜਾ ਗੋਰਾ ਹੈ ਸਤ ਗੋਰਾ ਹੈ ਉਸੇ ਨੂੰ ਕਿਹਾ ਹੋਇਆ ਤਰ ਬੁੜਾ ਹੈ ਅੱਛਾ ਜੀ ਉਹ ਦੇਵਤਾ ਹੈ ਉਹਦਾ ਉਹਦੇ ਹੋਰ ਆਉਂਦੀ ਹੈ ਅੱਛਾ ਜੀ ਉਹ ਨਹੀਂ ਬਣਾ ਰਿਹਾ ਵਿਚਾਰਾ ਉਹਦਾ ਹੁਸਲੀ ਹੈਗਾ ਤੇ ਵਿੱਚੇ ਕਿਹਾ ਤੱਕ ਨਹੀਂ ਹਾਂ ਹਾਂ ਲਿਆਉਂਦਾ ਠੀਕ ਦਿੰਦਾ ਲਿਆ ਕੇ ਠੀਕ ਹੈ ਜੀ ਕਿ ਤੇ ਨਾ ਆਪ ਕਿਦੋਂ ਤਿਆਰ ਕਰਕੇ ਆਪਣੇ ਕੋਲ ਕੋਈ ਉਹਦੇ ਕੋਲੇ ਕੋਈ ਗੱਲ ਐ ਚੀਜ਼ ਉਹਦਾ ਕੋਲ ਕੁਝ ਨਹੀਂ ਕਰਦਾ ਠੀਕ ਉਹ ਵੀ ਹੈ ਜੀ ਗਿਆਨ ਵੱਡਦਾ ਉਹ ਵੱਧਦਾ ਲਿਖਿਆ ਹਾਂਜੀ ਹਾਂਜੀ ਬਹੁਤ ਵੱਧ ਦੋ ਜਾਈ ਕੋਲ ਵੱਧਦਾ ਅੱਛਾ ਜੀ ਉਹਦਲਾ ਨਿਯੋਗ ਨੂੰ ਅੱਛਾ ਜੀ ਸਤ ਗੁਰ ਅਕੀਰ ਬਹੁਤ ਹੀ ਕੁਰਬਾਨ ਹੈ ਜੇ ਸਾਰੀ ਕੁਰਬਾਨੀ ਵੀ ਸਫਲ ਹੋਵੇ ਤਾਂ ਇਹ ਸੱਤੇ ਪਲਵੰਨ ਦੀ ਬਾਤ ਤਾਂ ਆ ਅਰਥ ਹੋਏ ਨਹੀਂ ਅਜੇ ਤੱਕ ਉਹ ਕੁਝ ਹੋ ਅਰਥ ਕੀਤੇ ਹੋਏ ਸਭ ਨੇ ਸਾਰੀ ਬਾਣੀ ਕੀਤੇ ਅਰਥ ਉਹਨਾਂ ਦਾ ਕੀਤੇ ਆਪਾਂ ਕਹਿ ਸਰਦੇ ਨਾ ਠੀਕ ਹੈ ਜੀ ਜਿਹੜੀ ਕਰਦੇ ਠੀਕ ਹੈ ਜੀ ਅੱਛਾ ਜੀ ਹਰ ਗੱਦਾਰ ਕਿਤੇ ਹਾਂਜੀ ਤੇ ਜਦੋਂ ਜਾਣ ਕੇ ਪੜ੍ਹਦਲੇ ਠੀਕ ਹੈ ਜੀ ਤੇ ਸਤਿਗੁਰ ਆਖੇ ਸੱਚਾ ਕਰੇ ਸਭਾ ਦਰਹਾਲੀ ਦੇਖੋ ਸਤਗੁਰ ਅੱਛਾ ਜੀ ਸੱਚਾ ਕਰੇ ਧੰਵਾਲਾ ਦਾ ਪਰਮੇਸ਼ਰ ਠੀਕ ਹੈ ਜੀ ਠੀਕ ਹੈ ਜੀ ਜੋ ਉਹ ਕਰਦਾ ਉਹ ਤਾਂ ਉਹ ਬੋਲਦਾ ਹੂੰ ਹੂੰ ਉਹ ਕਰਦਾ ਉਹ ਕਰਦਾ ਵੀ ਆ ਬੋਲ ਲਾਇਆ ਉਹ ਬਣਾਉਂਦਾ ਇਹ ਬੋਲਦਾ ਠੀਕ ਸਤਪੁਰ ਦਾ ਆਖ ਵੀ ਹੈ ਨਾ ਖਾਲੀ ਕੋਈ ਨਹੀਂ ਜਿਹਨਾਂ ਨੂੰ ਗੁਰਬਾਣੀ ਚੱਲਦਾ ਸਤਪੁਰ ਦਾ ਹੈ ਉਹ ਠੀਕ ਹੈ ਜੀ ਆਰੀ ਗੁਰਬਾਣੀ ਬਰਾਪਰੇ ਆ ਗਈ ਹਾਂਜੀ ਸਤਪੁਰ ਨਾਲ ਕਹਿੰਦਾ ਨਹੀਂ ਸਾਰੇ ਸਤਪੁਰ ਨੇ ਇਹਨਾਂ ਦੀ ਬਾਣੀ ਹੈ ਠੀਕ ਹੈ ਜੀ ਕਹ ਰਹਾ ਠੀਕ ਹੈ ਜੀ ਅੱਜ ਪਰ ਇੱਥੇ ਤਾਂ ਗੁਰਮੁਖੀ ਵਾਲੀ ਗੱਲ ਹੈ ਮੈਂ ਸਿੱਖ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਹਾਂਜੀ ਉਹ ਕਹੋ ਪਰプレਸ਼ਟ ਕਰਦਾ ਸਤਗੁਰ ਬੋਲਦਾ ਉਹ ਗੱਲ ਇੱਕ ਬੁਲਦੇ ਵਿੱਚੋਂ ਉਹ ਗੱਲ ਪ੍ਰਿੰਟ ਕਰ ਆ ਜਾਂਦੀ ਹੈ ਉਹ ਵਰਤੇ ਜਾਂਦਾ ਉਹ ਪਾਣਾ ਵਰਤੇ ਜਾਂਦਾ ਜਿਹੜਾ ਉਹ ਦੋ ਕਬੂਤਰ ਠੀਕ ਹੈ ਜੀ ਹਾਲੀ ਹਾਂਜੀ ਕਾਲੇ ਜਿਹੜਾ ਸਤਗੁਰ ਬੋਲਦਾ ਕੀ ਹੈ ਹਾਂਜੀ ਮਨਦਰ ਦਾ ਕਿੰ ਬਾਤਾਂ ਨਾਲ ਦੀ ਵਿਆਖਿਆ ਇਸ ਤਰੀਕੇ ਨਾਲ ਕੀ ਹੈਗਾ ਅੱਛਾ ਜੀ ਜਦੋਂ ਮੈਂ ਸਤਗੁਰ ਦੇ ਦੇ ਦੁਆਰੇ ਤੇ ਬੇਤ ਰਿਹਾ ਉਹੀ ਗੱਲ ਤਾਂ ਸਤਗੁਰ ਕਹਿ ਰਿਹਾ ਆ ਹੈ ਮਤਲਬ ਠੀਕ ਹੈ ਜੀ ਜਦੋਂ ਪਰਮੇਸ਼ਰ ਦੇ ਦੁਆਰੇ ਤੇ ਹੁਕਮ ਹੋ ਰਿਹਾ ਹੈ ਕਾਹਦੇ ਉਹ ਹੁਕਮ ਉਹੀ ਦਾ ਦੱਸ ਰਿਹਾ ਸਤਗੁਰ ਸਤਗੁਰ ਵਿਚਾਰ ਕੀ ਕਹਿ ਰਿਹਾ ਆਪਣੇ ਕੋਲ ਠੀਕ ਹੈ ਹਾਂ ਜੀ ਆਲਗਨਾ ਪ੍ਰੈਜੈਂਟ ਰੂ ਠੀਕ ਹੈ ਜੀ ਉਹ ਸਮਾਂ ਜੂ ਪਰਤਿਆ ਹੁੰਦਾ ਹੈ ਗੱਲ ਦੱਸ ਰਿਹਾ ਹੁੰਦਾ ਠੀਕ ਹੈ ਜੀ ਜਿਹੜਾ ਸਤਗੁਰ ਉਹ ਆਪਣੇ ਕੋਲੋਂ ਕੁਝ ਨਹੀਂ ਕਹਦਾ ਹੁੰਦਾ ਉਹ ਬੋਲਦਾ ਠੀਕ ਹੈ ਜੀ ਗੁਰ ਅੰਗਦ ਦੀ ਦੋਹੀ ਸੀ ਮੈਂ ਕਹਿਆ ਸਭ ਸੁਣੋ ਠੀਕ ਹੈ ਜੀ ਠੀਕ ਹੈ ਸਮਝ ਗਿਆ ਇਹ ਦੋਹਾਂ ਤੋਂ ਦਿਆ ਉਲਟਾ ਅੱਛਾ ਜੀ ਬਹੁਤ ਠੀਕਾ ਠੀਕ ਹੈ ਜੀ ਹਾਂ ਜੀ ਗੁਰ ਅੰਗਦ ਦੀ ਦੋਹੀ ਫਰੀ ਸੱਚ ਕਰਤਾ ਬੰਦ ਬਹਾਲੀ ਚਿਕਰ ਸਹਿ ਠੀਕ ਹੈ ਜੀ ਗੁਰ ਅੰਗਦ ਜੀ ਦੋਈ ਫਰੀ ਇਹ ਮੰਨ ਲਿਆ ਸੱਚ ਕਰਤਾ ਬੰਦ ਬਹਾਲੀ ਹੱਦ ਕਰਤੇ ਨੇ ਉਹਦੀ ਸੁਰਤ ਬੰਦ ਕੇ ਬਿਠਾਉਂਦੇ ਇੱਕ ਤੋਂ ਪ੍ਰਭੂ ਬੰਦ ਠੀਕ ਹੈ ਜੀ ਇਸੇ ਕਰਕੇ ਉਹਨਾਂ ਦੀ ਵਡਿਆਈ ਹੈ ਜੇਕਰ ਕਰਕੇ ਬਿੜਿਆ ਠੀਕ ਹੈ ਜੀ ਉਹ ਆਦੀ ਸੁਰਤਾਂ ਕੇ ਬਿਠਾਉਂਦੀ ਠੀਕ ਹੈ ਜੀ नानक काया पलट कर मल तख्त बैठा सह डाली। پتہ ਹੋਰੀਂ ਨਾਨਕ ਦੀ ਗੱਲ ਐ ਨਾਨਕੇ ਐ ਹੋਂ। ਠੀਕ ਹੈ ਜੀ। ਦਾ ਜਿਹੜਾ ਇੱਕ ਹੋਇਆ ਨਾ ਹਾਂ ਹਾਂ ਆ ਅਨਕ ਜੈਸਾ ਹੋਰ ਕੋਈ ਨਹੀਂ ਹਾਂਜੀ ਇੱਕ ਵਾਰ ਦਾ ਹੋਰ ਕੋਈ ਨਹੀਂ ਤੋ ਇੱਕ ਜੈਸਾ ਤੂੰ ਤੈਸਾ ਤੂੰ ਹੀ ਹੂੰ ਹੂੰ ਕਿਆ ਉਪਰੋਧੀਆ ਠੀਕ ਹੈ ਜੀ ਨਾਲ ਦਾ ਮਤਲਬ ਇਹ ਕਿ ਜੈਸਾ ਤੂੰ ਠੀਕ ਹੈ ਜੀ ਸਾਬ ਦਾ ਕਰਤ ਹਰਫ ਨਾਲ ਗਦਾ ਨਾ ਅਨੇਕ ਹੂੰ ਹੁੰਦਾ ਐਸਾ ਦੇਖ ਨਹੀਂਦੇ ਹੂੰ ਠੀਕ ਹੈ ਜੀ ਹੁਣ ਨੂੰ ਦਾ ਸਾਰ ਜਿਹੜਾ ਹੋ ਗਿਆ ਪੁੱਜਿਆ ਆਪਾਂ ਗੁਰਦਿਏ ਲੈ ਰਹੇ ਆਂ ਅੱਜ ਦੇ ਅਸਲਾ ਲੜਦੇ ਆ ਅੰਦਰ ਆਪਣੇ ਆਪ ਨੂੰ ਤਾਂ ਰਣ ਅੱਜਿਆ ਗੁਰਦਿਏ ਲਾ ਬੰਦ ਠੀਕ ਹੈ ਜੀ ਜਿੱਤੇ ਗੁਰਦਿਏ ਹੁੰਦਾ ਹੀ ਨਹੀਂ ਜੇ ਤੋ ਤੇ ਆ ਜਿੱਦੇ ਕਰਦੇ ਗੁਰਚੇਲੇ ਜੇ ਹਾਂਜੀ ਇਸ ਕਰਕੇ ਸ਼ੁਰੂ ਕਰਕੇ ਭਾਈ ਦੇ ਖੁਦਾ ਮਿਲੇ ਨੇ ਜਿੱਦੇ ਵੀ ਮਿਲੇ ਨੇ ਠੀਕ ਹੈ ਜੀ ਭਾਈ ਦਾ ਖਦਾ ਬਰਾदरी ਹੁੰਦਾ ਕੋ ਨਾਂਗਲੇ ਭਾਈ ਬੁਦਦਨ ਕੀ ਜੀ ਜਿਸ ਨਾਨਕ ਨਾਨਕ ਨੇ ਜਿਹੜੀ ਮਨ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿਡਾਲੀ ਕਿਉਂ ਆਇਆ ਕਰਨਾ ਮੈਂ ਡਾਲੀ ਸਹਿਡਾਲੀ ਹਾਂਜੀ ਸਹਿਡਾਲੀ ਉਸੇ ਡਾਲੀ ਤੇ ਬੈਠ ਗਿਆ ਜਿਹੜੀ ਅੱਛਾ ਜੀ ਉਹ ਡਾਲੀ ਹੈ ਨਾ ਸ਼ਬਦ ਸ਼ਬਦ ਜਿਹੜਾ ਹੈ ਨਾ ਸ਼ਬਦ ਉਹ ਕੋਈ ਸ਼ਬਦ ਸ਼ਬਦ ਰੁੱਖ ਹੈ ਨਾ ਹਾਂਜੀ ਸ਼ਬਦ ਰੁੱਖ ਹਾਂ ਜੀ ਬਈ ਸਭ ਜਨਤ ਹੁਣ ਤੱਕ ਕੋਈ ਮਿੱਠੇ ਕੋ ਬੋਲਣ ਬਿਠੇ ਹਾਂਜੀ ਬਈ ਮਿਰਸ਼ੇ ਖਾਨ ਜਨਤਾ ਇਕੱਠੇ ਕੁਝ ਮਿੱਠੇ ਕੁਝ ਬੋਲਣ ਦਿੱਤੇ ਕੋਈ ਸੱਤੇ ਕੋਈ ਬੋਲਣ ਬਿਠੇ ਹਾਂਜੀ ਜਿਹੜੇ ਬਿਠੇ ਨੇ ਇਹ ਉਹਦੇ ਉੱਤੇ ਬੈਠਾ ਕੋਈ ਭੱਲੇ ਬੈਠੇ ਨੇ ਅੱਛਾ ਜੀ ਬੈਠ ਗਿਆ ਉੱਕਬ ਦੇ ਨਾਲ ਜੁੜ ਆ। ਠੀਕ ਹੈ ਜੀ। ਪਰ ਇਹ ਜਿਹੜਾ ਨਾਨਕ ਐਡਜੈਕਟਿਵ ਹੈ ਨਾਨਕ ਕਾਇਆ ਪਲਟ ਕਰ ਵੀ ਨਾਨਕ ਪਲਟੀ ਹੈ? ਅੱਛਾ ਜੀ। ਕਾਇਆ ਪਲਟੀ ਜਾਈਂ ਨਾ ਬਣ ਰਿਹਾ। ਅੱਛਾ ਜੀ। ਕਿਤੇ ਕਿਤੇ ਰਿਹਾ ਜੀ ਜੀ ਜਦ ਇਹ ਪੋਨਾ ਤਾਂ ਇੱਕੋ ਜੇ ਉੱਪਰ ਆ ਫਿਰ ਨੰਕਾਰ ਹੋ ਜਾਂਦਾ ਹੈ ਅੱਛਾ ਜੀ ਉਹਦਾ ਨਾਮ ਰੌ ਨੰਕਾਰ ਹੈ ਬਜੇ ਦਾ ਨੰਕਾਰ ਹੈ ਠੀਕ ਹੈ ਜੀ ਜੇ ਸੱਚਖੰਡ ਵਸੇ ਨੰਕਾਰ ਤੇ ਸੱਚਖੰਡ ਦਾ ਵਾਸੀ ਹੋ ਗਿਆ ਠੀਕ ਹੈ ਜੇ ਹੈ ਇੱਕੋ ਹੀ ਹੈ ਤੇ ਤਾਂ दर जरा आया गया अच्छा जी तो एक हो गया है जी भी हो गया ना बीज तो वृक्ष हो गया ये पौधे उगवे ठीक है जी उग गया ठीक है जी ਜਦੋਂ ਉਹਦੇ ਬੀਜ ਤੋਂ ਫਰਸ਼ ਹੋ ਗਿਆ ਗਾਇਆ ਪਾਲਟੀ ਨਹੀਂ ਨਾ ਪਾਲਟੀ ਨਹੀਂ ਹਾਂਜੀ ਵੀ ਵੀ ਹੋਰ ਚੀਜ਼ਾਂ ਫਰਸ਼ ਹੋਰਦੀਆਂ ਹਾਂਜੀ ਵੀ ਕਿੱਥੇ ਗਿਆ ਹੂੰ ਹੂੰ ਵੀ ਤਾਂ ਫਿਰ ਠੀਕ ਹੈ ਜੀ ਜਦ ਜਨਪਦਾਨ ਸੁਲਦਾ ਬੀਜਰੀ ਨਾ ਫਿਰ ਫਿਰ ਜਵਣ ਜਾਂਦਾ ਠੀਕ ਠੀਕ ਹੈ ਜੀ। ਮੇਰਾ ਪੈਰਾਂ ਨਾਲ ਚੱਲਦਾ ਬਰਸ਼ੋਟਰ ਵੀ ਚੱਲਦਾ ਹੈ ਨਾ। ਬੱਤਾ ਨਾ ਬਰਸ਼ੇ ਚੱਲਦਾ ਸਰ। ਹਾਂਜੀ। ਘਰ ਘੱਟੇ ਰੋਦੇ। ਮੇਰਾ ਮਾਜੋ ਚੱਲਣਾ। ਹਾਂਜੀ। ਬੰਦਾ ਧੀ ਕਰਨਾ। ਹਟਾਈ ਰਿਹਾ ਸਭ ਨੂੰ। ਠੀਕ ਹੈ ਜੀ। ਹੁਣ ਰਿਹਾ। ਠੀਕ ਹੈ ਜੀ। ਰਿਹਾ ਪਬਲਿਕ ਵਾਸਤੇ ਬੱਚਾ। ਹਾਂਜੀ ਹਾਂਜੀ। ਦਰ ਸੇਵੇ ਉਮਤ ਖੜੀ ਮੁਸ਼ਕਲਾਂ ਹੋਈ ਜੰਗਾਲੀ ਦਰ ਸੇਵੇ ਉਪਤ ਖੜੀ ਸਾਧਾ ਖੜੀ ਆਉਂਦੀ ਹੈ ਬਸ ਕੱਲ੍ਹ ਜਿਵੇਂ ਬਸ ਹੁੰਦਾ ਨਾਲ ਉਹਦੇ ਦੇ ਨਾਲ ਲਾਉਂਦੇ ਆਏ ਵੇ ਹੈ ਅੱਛਾ ਸਾਥ ਚੱਲਦਾ ਤੇ ਜਦ ਸੁਰਤ ਬਤਵਨ ਬੁੱਧ ਲੋਕਾਂ ਦੀ ਸੁਰਤ ਬਤਵਨ ਬੁੱਧ ਖੜੀ ਜਾਂਦੀ ਹੈ ਉਮਮਤ ਹਿੰਦੂ ਸੰਗਤ ਉਮਤ ਹੀ ਨੂੰ ਕਹਿੰਦੇ ਅੱਛਾ ਜੀ ਅੱਗਤ ਨੂੰ ਉਬਤ ਕਹਿੰਦੇ ਬੰਦੀ ਭਾਸ਼ਾ ਚ ਅੱਛਾ ਜੀ ਕੋਪਟ ਬੋਲਿਆ ਨਾ ਮੁਸਲਮਾਨ ਨਾ ਉਹ ਅੱਛਾ ਜੀ ਕੋਪਟ ਹੈ ਇਹਦੇ ਇਹੇ ਜਾਂਦੇ ਨੇ ਨਾ ਸੰਗਤ ਜਿਹੜੀ ਜਾਣਦੀ ਹੈ ਇਹਨਾਂ ਦੇ ਪੀਰਾਂ ਕੋਲ ਉਹ ਉਪਤ ਕਹਿੰਦੇ ਨੇ ਆਪਾਂ ਸੰਗਤ ਕਹਿੰਦੇ ਠੀਕ ਹੈ ਹਾਂ ਜੀ ਸਰਦੇ ਉੱਤੇ ਹੁਣ ਤਾਂ ਹੁੰਦੀ ਹੈ ਹਾਂ ਜੀ ਤਾਂ ਜੇ ਵੀ ਇਹ ਵਿਚਾਰ ਕਰਦੀ ਹੈ ਸ਼ਬਦ ਨੂੰ ਸ਼ਬਦ ਉਹਨਾਂ ਸੁਣਦੀ ਹੈ ਜਿਹੜੇ ਵਿਚਾਰ ਕਰਦੀ ਹੈ ਉਹਨੂੰ ਜਿਹਨਾਂ ਠੀਕ ਹੈ ਜੀ ਜਿਵੇਂ ਮਸਕੱਲਾ ਕੋਈ ਪੱਥਰ ਹੁੰਦਾ ਨਹੀਂ ਨਹੀਂ ਮਸਕੱਲਾ ਇਹ ਤਾਂ ਉਹ ਰੇਤੀ ਦਾਪਣ ਹੁੰਦਾ ਜਿਵੇਂ ਢਾਕੂ ਵਗੂਦਾ ਹੈ ਅਛਾ ਜੀ ਜਦੋਂ ਦਾਤੇ ਦਾਤੀ ਦੇ ਦੱਸੇ ਤੱਕ ਨਾ ਉਹਦਾ ਨਾ ਹਾਂਜੀ ਐਂ ਜਾ ਤਿੱਖੀ ਢਾਰਜੀ ਬਣਾ ਲੈਂਦੇ ਰੇਤੀ ਵੀ ਉਹ ਐਂ ਕਿਸੇ ਵੀ ਹੋਵੇ ਕਿਸੇ ਵੀ ਭਾਂਡੇ ਤੋਂ ਹਥਿਆਰ ਤੋਂ ਕਿਵੇਂ ਵੀ ਹੋਰ ਕੋਈ ਕੁਝ ਵੀ ਈ ਹੋਵੇ ਜੇ ਕੋਈ ਕੁਰਬਾਨ ਹੋਵੇ ਜੰਦ ਲੱਗ ਜਾਂਦੀ ਈ ਨਾ ਹਾਂਜੀ ਹਾਂਜੀ ਲੱਗ ਜਾਂਦੀ ਆ ਠੀਕ ਹੈ ਜੀ ਫਿਰ ਉਹ ਰੇਤੇ ਨਾਲ ਰੇਗਮਾਲ ਨਾਲ ਪਹਿਲਾਂ ਫਿਰ ਇੱਕ ਮਾਲ ਨਾਲ ਠੀਕ ਹੈ ਨਹੀਂ ਤਰਾਂ ਨਾਲ ਫਿਰ ਉਹਨੇ ਚੰਕਾਉਂਦੇ ਨੇ ਅੱਛਾ ਜੀ ਦਰਦਰਵੇਸ਼ ਖਸਮ ਗਏ ਸੱਚੇ ਬਾਣੀ ਲਾਲੀ ਜੀ ਜਿਹੜੇ ਦਰਵੇਸ਼ ਨੇ ਉਹ ਉਹਦੇ ਦਰਦ ਤੇ ਖੜੇ ਨੇ ਤਾਂ ਹੀ ਦਰਵੇਸ਼ ਨੇ ਦਰਦ ਦੇ ਵਿੱਚ ਵੇਸ ਆ ਉਹਨਾਂ ਦਾ ਅੰਦਰ ਦੇ ਉਹ ਦਰਦ ਦੇ ਅੱਛਾ ਜੀ ਐਸਾ ਵੇਸ ਹੈ ਜਿਹੜਾ ਹੋ ਸੱਚਖੰਡ ਦੇ ਵਿੱਚ ਜਾਣ ਵਾਲਾ ਉਹਦੇ ਦੰਤ ਆਸਰੀਰ ਵਾਲਾ ਵੇਸ ਵੀ ਹੁੰਦਾ ਉਹਨਾਂ ਦਾ ਭੇਖ ਦੀ ਹੁੰਦਾ ਸਰੀਰ ਤੋਂ ਸੱਚਖੰਡ ਜਿਹੜਾ ਵੇਸ ਜਾ ਸਕਦਾ ਉਹ ਹੁੰਦਾ ਉਹਨਾਂ ਦਾ ਅੱਛਾ ਜੀ ਸਜੀ ਦਰ ਦਰਵੇ ਅੰਕਾਰ ਦੇ ਦੇਖ ਤੇ ਨਿਨਾਰ ਦਾ ਦੇਖ ਅੱਛਾ ਜੀ ਮਾਈਸ ਅਸਲੀ ਚੱਡਣਾ ਪੈਦਾ ਹੈ ਬਾਣੀ ਲਾਲੀ ਰਗੀ ਮਤਲਬ ਹੈ ਆ ਨਾ ਉਹ ਟੜਾ ਆਇਆ ਤਾਂ ਉਹ ਅੱਛਾ ਜੀ ਪੱਛਾ ਨੂੰ ਹੁਤਾ ਅੱਛਾ ਜੀ ਅੱਛਾ ਜੀ ਰੰਗ ਬਦਲਦਾ ਨਾ ਜਦੋਂ ਲੈ ਜਾਨ ਲੈ ਕੇ ਰੰਗ ਬਦਲ ਲੈਣਾ ਉਹਦਾ ਫਿਰ ਅੱਛਾ ਜੀ ਨਾ ਰੰਗ ਜਾਂਦਾ ਜਦੋਂ ਲੈ ਲੈਂਦੀ ਹੈ ਕਿਹੜਾ ਬੰਦੂ ਹੈ ਨਾ ਜਨਪ ਜਨਪ ਕਿਸ ਬੰਦ ਹੋਇਆ ਸੈ ਠੀਕ ਹੈ ਜੀ ਕਾਰ ਤੋਂ ਤਰ ਜਾਂਦੀ ਹੈ ਜੇ ਸਾਬੂ ਨਹੀਂ ਹੈ ਤਾਂ ਇਹ ਭਰੀਏ ਬੱਤ ਪਾਪਾ ਨਾਮਾ ਕਰ ਰੰਗ ਠੀਕ ਹੈ ਜੀ ਉਹ ਸੰਦਬੀ ਅਗਰ ਰਾਮ ਨੂੰ ਕੀ ਹੋਇਆ ਠੀਕ ਹੈ ਤੇ ਬਾਣੀ ਅਖਰ ਜਿਹੜੀ ਬਾਣੀ ਹੈ ਪੱਕੀ ਬਾਣੀ ਹੈ ਹਨਾ ਜੀ ਹਾਂ ਪੱਕੀ ਗੁਰਬਾਣੀ ਨਾ ਨਾ ਹੈ ਸੱਚਾ ਬਾਣੀ ਲਾਲੀ ਫਿਰ ਇਹ ਤਾਂ ਗੁਰਬਾਣੀ ਨਾ ਹੋਈ ਫਿਰ ਤਾਂ ਪੱਕੀ ਬਾਣੀ ਹੋਈ ਜਿਹੜੀ ਉਹ ਹੈ ਬਾਣੀ ਗੁਰੂ ਹਾਂ ਜੀ ਹਾਂ ਜੀ ਸਤਿਗੁਰੂ ਧੋਲੀ ਜੀ ਸੁਣਦੀ ਹੈ ਹਾਂ ਹਾਂ ਆਪਣੀ ਵਾਰੀ ਨੂੰ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਜੀ ਇਹ ਗੱਲ ਵਾਲੀ ਜਿਹੜੀ ਹੈ ਉਹ ਸੱਚੀ ਬਾਣੀ ਹੈ ਉਹ ਕੱਚੀ ਹੈ ਸੱਚੀ ਮਾਇਆ ਦੇ ਵਿੱਚ ਹੈ ਜਿਹੜੀ ਠੀਕ ਹੈ ਜੀ ਉਹ ਗੱਲਿ ਬਾਣੀ ਉਹਨੂੰ ਸੱਚੀ ਬਾਣੀ ਲੱਗਿਆ ਹਾਂ ਪਰ ਇੱਥੇ ਵੀ ਬਾਣੀ ਤਾਂ ਕੱਲਾ ਵਰਡ ਹੀ ਹੈ ਨਾ ਨਾ ਸੱਚਾ ਹੈਗਾ ਬਾਣੀ ਨਹੀਂ ਲੱਗ ਬਾਣੀ ਲਾਲੀ ਬਾਣੀ ਦੀ ਲਾਲੀ ਚੱਲ ਰਹੀ ਹੈ ਆਹ ਲਾਲੀ ਤਾਂ ਉਹਦੇ ਠੀਕ ਹੈ ਜੀ। ਖਬਰਾ ਵਿੱਚ ਉਸੇ ਦਾ ਲੰਦਾ ਹੈ। ਅੱਛਾ ਜੀ। ਖਬਰਾ ਉਹ ਜਾਂਦਾ ਉਸੇ ਲਈ ਤਾਂ ਉਹੀ ਜਿਹੜਾ ਦੁੱਧ ਹੀ ਪਾਇਆ ਠੀਕ ਹੈ ਜੀ। ਜਿਹੜੇ ਜਿਹੜੇ ਬੱਕਰ ਦਾ ਜਿਹੜੇ ਵੀ ਇਹੇ ਜੋ ਹਵਾ ਉੱਕੀਏ ਤਾਂ ਉਡਰਦੀ ਹੈ। ਆ ਕੇ ਦੇਰੀ ਰੰਮੀ ਉਹ ਜਿਹੜਾ ਬਿੱਟੀ ਦਾ ਲੰਦ ਸੀ ਉਹੀ ਉਹ ਧੂੜ ਟਿਕੂਆ ਲੀ ਗਿਆ ਜੀ ਆਹ ਇਹ ਸਾਡਾ ਆ ਉੱਥੇ ਅੱਛਾ ਜੀ ਐਸਾ ਜੀ ਕੋਈ ਆਵੇ ਤੇ ਟੋੜ ਦੇਖੋ ਭਾਈ ਗਾਂ ਕੀ ਆ ਯਾਰ ਠੀਕ ਹੈ ਜੀ ਲੈ ਜਾ ਗਾਂ ਦੀ ਟੋੜ ਬਲਵੰਡ ਖੀਵੀ ਨੇਕ ਜਾਨ ਜਿਸ ਬਹੁਤੀ ਛਾਂ ਬਤਰਾਲੀ ਖੀਵੀ ਦੇਖੋ ਖੀਵੀ ਦੇ ਨਾਲ ਜਨ ਜਨ ਪੁਲੰਡਾ ਹਾਂ ਬਲਵੰਡ ਜਿਹੜਾ ਬਲਵੰਡ ਕਹ ਰਹੇ ਹਾਂ ਜੀ ਬਲਵੰਡ ਚਾਹੇਗਾ ਨਾ ਬਲਵੰਡ ਠੀਵੀ ਦੇਖ ਜਾਊ ਹਾਂਜੀ ਬਲਵੰਡ ਕਹਿੰਦਾ ਵੀ ਜਿਹੜੀ ਠੀਵੀ ਹੈ ਜਿਹੜੀ ਬੁੱਧੀ ਜਿਹੜੀ ਬੁੱਧੀ ਨੂੰ ਨਾ ਉਹਦਾ ਰੰਗ ਜਿਹੜੀ ਬਵੇਕ ਬੁੱਧੀ ਆ ਲੋ ਹਾਂਜੀ ਬਵੇਕ ਉਹਦੀ ਠੀਵੀ ਵੀ ਬਦਲੀ ਹੋਈ ਜਿਹੜੀ ਬੁੱਧੀ ਆ ਠੀਕ ਹੈ ਠੀਵੀ ਦੇਖ ਜਾਣਾ ਹਾਂਜੀ ਹਾਂਜੀ ਉਪਰ ਨੂੰ ਹੋਰ ਕੋਈ ਆਇਆ ਸੀ ਥੇਲਵਾਜੀ ਚਲੋ ਭਲਵਾਨ ਨੇ ਕੀ ਵੀ ਨਹੀਂ ਭਲਵਾਨ ਨੇ ਅਨਾਰ ਕੋ ਕੀ ਬਈ ਦੇਖ ਭਲਵਾਨ ਕੀ ਵੀ ਨੇਕ ਜਾਨ ਜਿਸ ਬਹੁਤ ਹੀ ਸ਼ੌਂਕ ਬਤਰਾ ਗੇ ਜਿੱਤੇ ਖਾ ਪੱਤੇ ਜਿਆਦਾ ਔਰ ਘਰੋਂ ਵਰਸਦੀ ਹੋਵੇ ਉੱਥੇ ਜਾ ਠੀਕ ਜੀ ਆਮ ਲੋਕਾਂ ਨੂੰ ਹੀ ਭਲੇਖਾ ਪੈਂਦਾ ਵੀ ਖੀ ਵੀ ਸ਼ਾਇਦ ਗੁਰੰਗਰ ਸਾਹਿਬ ਪਤਨੀ ਸੀ ਲਈ ਜੀ ਇਹ ਭਲੇਖਾ ਪੈਂਦਾ ਅਸਲ ਵਿੱਚ ਇਸ ਅਵਸਥਾ ਜਾ ਕੇ स्त्री ਹੋਈ ਹੋਇਆ ਆਦਮੀ ਦੇ ਬੰਦੇ ਹੋਇਆ ਰਹਿੰਦਾ ਔਰ ਕਿੱਟਾ ਹੁੰਦਾ ਭਲੇ नहीं ਹੈ ਖੱਤੇ ਨੂੰ ਯਾਰੀ ਹੈ ਠੀਕ ਹੈ ਜੀ ਲੈ ਅਲਪ ਸੁਪਿਛਾੜ ਪਰਮ ਸੁਖ ਬਾਵਾ ਇਹ ਤੇਰੀਆ ਉਹ ਗੰਤ ਕਹਾਵਾ ਇਥੇ ਛੀਵੀ ਹੋਊਗਾ ਅੱਛਾ ਜੀ ਨਹੀਂ ਪਰ ਇੱਥੇ ਆਪਾਂ ਦਾ ਆਖ ਕਰ ਰਹੇ ਨੇ ਕਿ ਛੀਵੀ ਛੀਵੀ ਵਿਵੇਕ ਮੁੱద్ధి ਹੈ ਪਰ ਜਿਹੜੇ ਆਮ ਅਰਥ ਇਹ ਹੁਣ ਉਹਨਾਂ ਨੂੰ ਇਹ ਭਲਾ ਖਪਲੇ ਖਪੈਂਦਾ ਕਿਉਂਕਿ ਗੁਰੰਗਸਾਹਬ ਦੀ ਗੱਲ ਚੱਲ ਰਹੀ ਹੈ। ਪੁੱਤ ਜੀ ਲੰਦਰ ਬਹੁਤ ਨਾ ਸਬਰ ਤੇ ਖੀਰ ਖਿਆਲੀ। ਹਾਂਜੀ। ਉਹ ਤੋਂ ਭਲੇ ਦਾ ਪਾਇਆ ਹੈ। ਠੀਕ ਹੈ ਜੀ। ਗੱਲ ਕੁਝ ਹੋਰ ਹੈ। ਹਾਂਜੀ ਬਸ ਸੱਤ ਸਾ ਗੁਰਬਾਨੀ ਦੀਓ ਹੈ। ਹਾਂਜੀ। ਇਹ ਅੰਬਰ ਕਹਿੰਦੇ ਕਿ ਹੱਲੀ ਆ ਕਿ ਉਹ ਤੋਂ ਬੜੀਆਂ ਆਏ ਦੁੱਧ ਖੀਰ ਦਾ ਦੁੱਧ ਹੁੰਦਾ ਖੀਰ ਦਾ ਉਹ ਚੌੜਾ ਵਾਲੀ ਖੀਰ ਨਹੀਂ ਹੁੰਦਾ ਹਾਂਜੀ ਨੇ ਫੇਰ ਖੀਰ ਬਣਾ ਲਈ ਚੌੜਾ ਵਾਲੀ ਹਾਂਜੀ ਘਿਓ ਪਾਇਆ ਕਿਉਂ ਚੌੜਾ ਦੁੱਧੇ ਘਿਓ ਪਾ ਕੇ ਦਿੰਦੇ ਨੇ ਖੀਰ ਦੇ ਵਿੱਚ ਸੰਘਰੂ ਆ ਬਣਾ ਲੈ ਹਾਂਜੀ ਘਰ ਵਾਲੀ ਬਹੁਤ ਵੇਗ ਦੀ ਘਰ ਵਾਲੀ ਦੁੱਧ ਵੀ ਪਤਲਾ ਕਰ ਦਿੰਦੇ ਖੀਰ ਹੋਰ ਘਿਓ ਪਾ ਕੇ ਨਾ ਦੱਸ ਦੇ ਹਾਂਜੀ ਇਸ ਤਰ੍ਹਾਂ ਕੀਤੇ ਹਾਂ ਤੇ ਢਾਲ ਲਿਖਿਆ ਹੈ ਢਾਲ ਲਿਖਾ ਤੇ ਹੈ ਇਹ ਜਿਹੜੀ ਜੀ ਦੁੱਧ ਤੋਂ ਬਣਦਾ ਹਾਂਜੀ ਫਿਰ ਅਗਲੀ ਨਰਮੀ ਫਿਰ ਪੰਕਤੀ ਆਈ ਹੈ ਨਾ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਲੰਗਰ ਜਿਹੜਾ ਉਹ ਦੌਲਤ ਵੰਡੀ ਦੀ ਇਹਨਾਂ ਨੂੰ ਇਹ ਸ਼ੱਕ ਹੈ ਵੀ ਲੰਗਰ ਵਿੱਚ ਫੇਰ ਜੇ ਆਪਾਂ ਨੂੰ ਇਹ ਸੋਚਾਂਗੇ ਕਿ ਪੈਸੇ ਵੰਡੇ ਜਾ ਰਹੇ ਹਨ ਖੀਰ ਖਲਾਈ ਜਾ ਰਹੀ ਹੈ ਪਰ ਗੱਲ ਦਾ ਰੋਹਾਨੀਅਤ ਹਾਂਜੀ। ਸਭ ਕਹ ਰਿਹਾ ਠੀਕ ਹੈ ਜੀ। ਆਪਾਂ ਨੇ। ਹਾਂਜੀ। ਰਾਸამართ ਕੀ ਕਿਹਾ ਲਈ ਰਾਸ ਕੀ ਅਮਰਤ ਦਾ ਦਾਸ ਆਹੋ ਅਮਰਤ ਦਾਸ ਹਾਂਜੀ ਕੀਰ ਕਿਹਲੇ ਤੋਂ ਤੇ ਐ ਸਮਝ ਲੋ ਦੁੱਧ ਘਿਓ ਦੀ ਨੀ ਕੋਟਾ ਹੋ ਹੈ ਦੇ ਵਿੱਚੋਂ ਇਸ ਦਾ ਪਿੰਦਾ ਦੁੱਧ ਹੈ ਹੈ ਜੀ ਰਾਸਨ ਆਮਦਾਰਿਆ ਹੈ ਲਬ ਤੋ ਉਹੀ ਦੇ ਹਾਂਜੀ ਲਬਸਾ ਪੰਜਾਬੀ ਰਹੀ ਨੇ ਹਾਂਜੀ ਠੀਕ ਹੈ ਜੀ ਹਾਂ ਕੇ ਮੁਕ ਉਜਲੇ ਮਨ ਪਰਾਲੀ ਜਦ ਕਿ ਆਇਆ ਨਾ ਛਾਛ ਪੀਏ ਸੰਸਾਰ ਹਾਂਜੀ ਜਿਹੜਾ ਸੰਸਾਰ ਆ ਉਹਨੇ ਛਾਛ ਬਣਾਤਾ ਜੱਥ ਕਰਕੇ ਅੱਛਾ ਜੀ ਪਹਿਲੇ ਆਪੇ ਵਾਲੇ ਤੇ ਹਾਂਜੀ ਹਾਂਜੀ ਉਹ ਬੱਕਾ ਨੂੰ ਲਾਦਾ ਉਹਨੇ ਸਾਹ ਦਾ ਪੀਤੀ ਹੋਣੀ ਹਾਂਜੀ ਤਾਂ ਹੀ ਫਿਰ ਉਹਨਾਂ ਦੇ ਮੁਖ ਉਜਲੇ ਹਾਂਜੀ ਆਹ ਤਾਂ ਹੀ ਮੁਖ ਉਜਲੇ ਨੇ ਤੇ ਮਨਮੁਖ ਥੀਏ ਪਰਾਲੀ ਪਰਾਲੀ ਦਾ ਮਤਲਬ ਪਰਾਲੀ ਵਰਗੇ ਨਹੀਂ ਪਰਾਲੀ ਵਰਗੇ ਫਰੇਬ ਨਹੀਂ ਪਏ ਉਹਨਾਂ ਦੇ ਕਣ ਦੀ ਦਾਣਾ ਨਹੀਂ ਹੈ ਲੱਗਿਆ ਸੱਤ ਨਹੀਂ ਹੈ ਪਰਾਲੀ ਰਹਿ ਗਈ ਅੱਛਾ ਜੀ ਪੁੱਲ ਲੱਸੀ ਕਹਿੰਦੇ ਤੇ ਪ੍ਰਾਲੀ ਕਹਿੰਦੀ ਠੀਕ ਹੈ ਜੀ। ਮੁੱਠਾ ਲੱਸੀ ਕਹਿੰਦੇ ਤੇ ਪ੍ਰਾਲੀ ਕਹਿੰਦੀ ਹਾਂਜੀ। ਪ੍ਰਾਲੀ ਦਾ ਬਰੇੜੀ ਐ, ਦੰਦਾਂ ਦਾ ਬਰੇੜੀਆਂ ਕਰ ਦਿੰਦੇ ਐ। ਟੀਕਾ ਦਾ ਬਰੇੜਾ ਬੜਾ ਬਣਾਤਾ। ਹਾਂਜੀ। ਪਰ ਤੱਤ ਹੈ ਦੀ ਵਿੱਚ। ਠੀਕ ਹੈ ਜੀ। ਸਾਡੇ ਜੀ ਬੁਲਾਵਾ ਨਾ ਤੱਤ ਚਲਾ ਗਿਆ। ਹਾਂਜੀ। ਤੇ ਐ ਪ੍ਰਾਲੀ। ਪਏ ਕਬੂਲ ਖਸਮ ਨਾਲ ਜਾਂ ਘਾਲੀ। ਹਾਂਜੀ ਮਰਦਾਨੀ ਕਾਲ ਕੀ ਬੰਦ ਕਬੂਲ ਕਰਦਾ ਅੱਛਾ ਜੀ ਮਰਦਾਨੀ ਗਾਲ ਢਾਲ ਲਈ ਐ ਬੰਦ ਕਬੂਲ ਕਰਕੇ ਚਲਿਆ ਤੇ ਉਹ ਗਾਲ ਕਬੂਲ ਹੋ ਗਏ ਦਰ ਤੇ ਠੀਕ ਹੈ ਜੀ ਜੇ ਮਰਦਾਨੀ ਗਾਲ ਕਰ ਲਿਆ ਉਹ ਦਰ ਤੇ ਕਬੂਲ ਹੋ ਗਏ ਜਿਹਨੇ ਬੰਦੀਆਂ ਗੁਰਬਾਣੀ ਮੰਨ ਲਈ ਦਾ ਕਬੂਲ ਹੋਰ ਦਾ ਕਬੂਲ ਹੀ ਹੈ ਹਾਂ ਹਾਂ ਬਣ ਸਕਦੀ ਗੁਰਬਾਣੀ ਕੋਈ ਕਦੇ ਵੀ ਅੱਛਾ ਜੀ ਅੱਜ ਤੱਕ ਹੈ ਫਾਜ਼ਲੀ ਵਾਲੀ ਦੀ ਬੁੱਧੀ ਹੂੰ ਹੂੰ ਜਦੋਂ ਨੇਂਦੀ ਉਹ ਵੀ ਉਸੇ ਵਾਸਤਨ ਕੋਈ ਜਾਂਦੀ ਠੀਕ ਹੈ ਜੀ ਉਹ ਵੀ ਵਰਵੰਡੀ ਔਰ ਤੇ ਰੱਖਦੀ ਹੈ ਬਨਾ ਦਾਦਾ ਫਰਕ ਠੀਕ ਹੈ ਜੀ ਸ਼ਰਦਾ ਰੱਖਣਾ ਜੇ ਪੂਰੀ ਸ਼ਰਦਾ ਰੱਖ ਲਵੇ ਪੂਰੇ ਪ੍ਰੇਮ ਨਾਲ ਤਤੋਖੀ ਵੱਡ ਜੁਲਦਾ ਵੀ ਕੱਚਾ ਹੁੰਦਾ ਪੱਕਾ ਜਿਹਾ ਤੋਖੀ ਸਾਤ ਸੰਤੋਖੀ ਹੁੰਦਾ ਤੋ ਵੀ ਰੂਰ ਹੁੰਦਾ ਠੀਕ ਹੁੰਦਾ ਠੀਕ ਹੈ ਜੀ ਤੇ ਫਿਰ ਹਾਂ ਫਿਰ ਹਾਂਜੀ ਤੇ ਹਾਂ ਬਸ ਤੋਂ ਬਾਹਰ ਫਿਰ ਵੀ ਆਪਣੀ ਵਰਗੀ ਦਾ ਜਲ ਜ਼ਰੂਰ ਲੱਗਦਾ ਠੀਕ ਹੈ ਜੀ ਕਰਦਾ ਹੁੰਦੀ ਹੈ ਬਲਟੇ ਮਾਤਾ ਮਾਤਾ ਖੀਵੀ ਸੋਏ ਜਿੰਨ ਗੋਏ ਆ ਗਿਆ ਮਾਤਾ ਕੀ ਵੀ ਹਾਂ ਆ ਤਾਂ ਇਹ ਮੁੱਖ ਦੋ ਬੇ ਗੁੱਦੀਆ ਇਹ ਪਤੀ ਕੌਣ ਆਪ ਹੈ ਪਰਵਿਸ਼ਰ ਹੂੰ ਹੂੰ ਰੰਤਾਰੇ ਦਾ ਪਤੀ ਆਪ ਹੈ ਪਤੀ ਆਪ ਕਿਦੇ ਵਾਸਤੇ ਆਇਆ ਗੋਏ ਕੀ ਅਸੀਂ ਗੋਏ ਦਾ ਕੀ ਅਰਥ ਹੈ ਜਿਹੜਾ ਦੇ ਵਿੱਚ ਬਿੱਟੀ ਜੀ ਬਿੱਟੀ ਵੀ ਮੋਰਸੇ ਵਿੱਚ ਪਾ ਕੇ ਬਾਟੀ ਦਾ ਪੁੱਤਲਾ ਕੈਸੇ ਨਿਕਟਾ ਹੈ ਜੇਬਾ ਹੋ ਗਿਆ ਹੂੰ ਹੂੰ ਜੇਬਾ ਆਤਮਾ ਦੇ ਫੋਕ ਮਿੱਠੜ ਕੇ ਉਖਾਲਦਾ ਹੈ ਨੂੰ ਅੱਛਾ ਜੀ ਨਾਲ ਨਿਕਟਾ ਕੈਸੇ ਦੇਖ ਕੇ ਸੁਣੇ ਦੌੜਿਓ ਫਿਰਤਾ ਤੇ ਗੋਇ ਉਠਾਲੀ ਹੈ ਗੋਰਤ ਕੋਲੋਂ ਜਿਹੜੇ ਗੋਇ ਉਠਾਲੀ ਈਰਦੀ ਆਤਮਾ ਦੇ ਵਿੱਚ ਪਾ ਕੇ ਉਹਦੇ ਵਿੱਚ ਹੁਕਮ ਨਾਲ ਉਠਾਲੀ ਆ ਉਹ ਗੋਰਖਾ ਹੈ ਉਹ ਰક્ષਕ ਹੈ ਅਗਰ ਹੈ ਉਹ ਹੁਕਮ ਹੁਕਮ ਨਾਲੇ ਆ ਹੁਕਮ ਦੀ ਉਹ ਗੱਲ ਹੈ ਇੱਥੇ ਹਾਂ ਹਾਂ ਤਾਂ ਗੋਇਆ ਸੀ ਆਤਮਾ ਨੂੰ ਕਹਾਂਗੇ ਆਤਮਾ ਰક્ષਕ ਰક્ષਕ ਕੋਲ ਠੀਕ ਹੈ ਬਿੱਟੀ ਦੇ ਬੂਹੇ ਦੇ ਯਾ ਤੇ ਜਗਾਈ ਨਹੀਂ ਬਸ ਸੁੱਤੀ ਪਈ ਜਗਾਈ ਕਹਿ ਲੋ ਹੁਣ ਇਹਨੇ ਜੁੱਤੀ ਪਈ ਜਗਾਈ ਐ ਪਹਿਲਾਂ ਸਾਧ ਦਿਆਪੀ ਨਾਲ ਜੇ ਕਹਾਂਗੇ ਇੱਥੇ ਦਾ ਸੱਚ ਸ੍ਰੀ ਚਪਾ ਕੇ ਇਹਨੂੰ ਪੁਠਾ ਲਿਆ ਮਿੱਟੀ ਨਾਲ ਹੁਣ ਇਹਨੂੰ ਜਗਾ ਕੇ ਸ੍ਰੀ ਰੇਸ਼ੜਾਤਾ ਇਹ ਤਬਰੀਦਾ ਸੋਧਿਆ ਠੀਕ ਹੈ ਜੀ ਠੀਕ ਹੈ ਜੀ ਇਹ ਹੁਣ ਆਪਾਂ ਹਾਂਜੀ ਆਜੋ ਹੋਇਆ ਜਾਂਦੇ ਜਲਦੀ ਜਲ ਬਾਤ ਹੀ ਜਾਂਦੀ ਠੀਕ ਹੈ ਸਹਿਜ ਦਾ ਸਹਿਜ ਦਾ ਮਤਲਬ ਗਿਆਨ ਸਹਿਜ ਦਾ ਮਤਲਬ ਗਿਆਨ ਹੋ ਜਦੋਂ ਗਿਆਨ ਜਦੋਂ ਇਹ ਸਮਝ ਆ ਜਾਵੇ ਕੋਈ ਬਾਣੀ ਫਿਰ ਟਿਕ ਜਾਂਦਾ ਵਣ ਫਿਰ ਅਸਲੀ ਮੱਤ ਜਾਗਦੀ ਹੈ ਅੱਛਾ ਜੀ ਫਿਰ ਬੁੱਧ ਤੇ ਜਾਂਦੀ ਹੈ ਇਹ ਫਿਰ ਬਦਲਦੀ ਹੈ ਜਾਂ ਮਨ ਜਾਗਦਾ ਬੁੱਧ ਜਾਦੀ ਹੈ ਇੱਕੋ ਜਿਹੀ ਗੱਲ ਹੈ ਠੀਕ ਹੈ ठीक है। ठीक है जी, अब अपनी फिर तीसरी पौड़ी इदि इथे समाप्त है। आपा फिर हूं इस तो आगे चौथी पौड़ी शुरू कर देंगे जी।